ਹਰ ਸਮਰੰਗ ਕਰ ਭਗਤ ਪੁਰਖ ਪ੍ਰਗਟਾਏ ਜਿਹੜਾ ਭਗਤ ਦਾ ਪ੍ਰਗਟ ਰੂਪ ਹੈ ਉਹ ਕਦਾ ਸਰਦਾ ਹੋਰ ਸਬੂਤ ਵਾਸਤੇ ਕਹਿੰਦਾ ਸੰਤੋਖ ਤੱਕ ਦੀ ਜਿਹੜੀ ਗੱਲ ਹੈ ਬਿਲਕੁਲ ਕਿਸੇ ਤੋਂ ਵਿੱਧੀ ਹੈ ਕੇ ਲੋੜ ਨਹੀਂ ਉਹ ਸਾਰੀ ਮਨ ਜਾੜਨ ਸਭ ਬਾਤ ਹੈ ਸੁਤੋਖ ਤੱਕ ਦੀ ਪੜਾਈ ਨੂੰ ਕਹਾਂ ਬੋਲ ਜਾਂਦੇ ਸਾਬ ਬਾਤ ਜਾਣਦੀ ਉਹ ਗੁੰਜਰ ਹੈ ਆਏ ਕੇ ਕੁਸ਼ਲਾਤ ਹਾਤ ਦੀ ਖੂਲ ਪੜੇ ਐਸੇ ਤੋਂ ਤਕਰੀਅਤ ਹੀ ਪੜਾਈਓ ਇਹ ਹੀ ਸਾਰੀਆਂ ਬਤਾਂ ਹੋਣ ਐ ਇਹ ਜਿਹੜਾ ਸੁੱਧ ਬਤਾ ਚਿੱਤ ਹੈ ਉਹਦੇ ਲੈ ਗੁੰਦੀ ਪੜਾਈਏ ਸਾਰੇ ਜਿਹੜੀ ਅਸੀਂ ਬੋਲਤਾ ਦਿਲ ਲਈਏ ਵਰਤੂ ਕਿਹੜੀ ਗੱਲ ਅੜੀ ਅਸੀਂ ਜਾਣਦੇ ਨਹੀਂ ਹਾਂ ਜਾਣਦੀ ਹਾਂ ਹਉ ਤਾਂ ਗੰਗਾ ਸਵਰਨਾ ਵਾਲੀ ਗੱਲ ਹੈ ਉਹ ਗਿਆਨ ਜਾ ਰਹਿ ਨੋਬਲਾ ਕਿਆ ਕਰ ਗੋਬੋਲਾ ਕਿਆ ਕਰ ਇਹ ਤਾਂ ਆਪਣੇ ਬਸ ਦੀ ਗੱਲ ਹੈ ਕੰਮ ਜਾਈ ਤੇ ਕਰ ਸਕਦੇ ਇਹਦੇ ਵਿੱਚ ਨਹੀਂ ਬਹੁਤੀ ਕੋਈ ਗੱਲ ਜਿਹੜੇ ਭਗਤ ਪੈਦਾ ਕੀਤੇ ਜੋ ਫਰਕ ਉਹ ਸੁਣਾਵਾ ਕੇ ਫਰਕ ਉਹ ਅਗਲੇ ਪ੍ਰੋਜੈਕਟ ਦੋ ਪਦਾ ਜਿਹੜੇ ਦਹਾਣ ਵਾਲੇ ਪਹਿਲੇ ਦੋ ਪਦਾ ਸਮਝਾਤੇ ਭਗਤ ਜੀ ਹੋਰ ਨਹੀਂ ਹੈ ਪਹਿਲੇ ਦੋ ਪਦਾ ਤੋਂ ਉਹਦੇ ਕੋਲ ਆਪਣੇ ਅਰੇ ਰਦਾਸ ਕੋਲੇ ਦੀ ਕੋਣ ਕਹਿ ਗਿਆ ਲੈ ਲੈ ਤੂੰ ਛੋੜ ਦੇ ਦਿਓ ਲੈਲਾ ਆਪਣੀ ਬਦਲਣ ਸੰਗ ਨਾ ਨਾ ਬਹੁਤ ਹੀ ਹੋ ਚੜੀ ਸੀ ਮਾਰ ਸੋਹੇ ਨੂੰ ਲਾਦੀ ਛੋੜੋ ਬਣਾ ਦੀ ਜਦੋਂ ਮੈਂ ਕਰਨਾ ਥੇ ਤਾਂ ਮੇਰੇ ਹੱਥ ਬੁਰੀ ਲਾਇਆ ਉਹ ਇਹ ਨਹੀਂ ਅੱਲਾ ਤਾਂ ਪਹਿਲਾਂ ਜਾਂਦੇ ਸੀ ਲੋਕ ਇਹ ਤਾਂ ਬਹੁਤ ਥੱਲੇ ਦੇ ਦਰਜੇ ਦੇ ਵੀ ਲੋਕ ਗੱਲ ਤਾਂ ਉਹਦੀ ਬ੍ਰਿਤੀ ਦੇ ਗਲਤੀ ਗੱਲ ਜੀ ਤਾਂ ਮੋਟਾ ਇਹ ਗੱਲ ਗੰਭੀਰ ਕਰ ਭਗਤ ਕਰਾਉਣਾ ਸੀ ਅੱਗੇ ਹੁਣ ਹੋਰ ਇਕ ਆਦਮੀ ਦੇਖ ਹੁੰਦੇ ਨੇ ਇੱਕ ਦੇਖ ਆਦਮੀ ਛੱਡ ਕੇ ਸੱਚ ਖਾਣ ਲੋਕ ਪਜੌੜੇ ਸੀ ਉਹ ਇੱਥੋਂ ਆਖੇ ਜਿਹੜੀ ਕਹਾਣੀ ਦੀ ਗੱਲ ਹੈ ਉਹ ਭਗਤ ਪ੍ਰਕਾਸ਼ਦਾ ਇੱਥੋਂ ਭੇਜਣ ਵਾਲੇ ਬਾਹਰ ਦੇ ਜਾ ਕੇ ਵਾਲੇ ਉਹ ਦਾਦੇ ਨੂੰ ਕਹਾਂ ਜਾਣਾ ਸਫਰ ਹੈ ਉਹ ਕਿੱਥੇ ਹੈ ਉਹ ਇਥੇ ਤੱਕ ਤਾਂ ਆਪੇ ਆ ਜਾਂਦਾ ਇਥੇ ਤੱਕ ਕਹੇ ਜੇਤ ਜੇਤਵਾਰੇ ਉੱਪਰ ਤੇ ਤੇਰੇ ਲਈ ਵਾਰ ਉਹ ਤਾਂ ਆਪਣੇ ਆਪੇ ਉੱਪਰ ਪੁਛਾਰਿਆ ਨੇ ਉੱਥੇ ਤੱਕ ਆਪਣੇ ਆਪੇ ਸਾਰੇ ਉੱਪਰ ਸਭ ਦੇ ਉਹ ਕੱਲਾ ਅਲੱਗ ਹੈ ਕਿ ਅਸੀਂ ਕਿਸੇ ਨੂੰ ਗੁਰੂ ਬਣਾ ਲੈਂਦੇ ਆ ਜਾਂ ਕਿਸੇ ਬੰਦੇ ਕੋਲ ਆ ਜਾਂਦੇ ਅਸੀਂ ਗੁਰਬਾਨੀ ਦੀ ਲੜ ਲਾ ਕੇ ਉਹ ਕੱਲਾ ਅਲੱਗ ਹੈ ਪਰ ਉਹ ਬੰਦੇ ਦੇ ਬਦਨਾਮ ਤਾਂ ਉਹ ਕਿਤੇ ਵੀ ਜਾਇਆ ਨਹੀਂ ਕਿਤੇ ਬੰਦੇ ਦੇ ਬਦਨਾਮ ਪਰ ਉਹਦਾ ਗੱਲਾਂ ਨੇ ਬੰਦਾ ਗੁਰਬਾਨੀ ਦੀ ਆਪੇ ਸਾਰੇ ਜਾਣਦੇ ਹੀ ਪਰ ਲੈਵਸ ਜਿਹੜਾ ਨੋਸ ਪੱਲੇ ਹੈ ਜਿਆਦਾ ਗਹਾਂ ਹੈ ਤੋਂ ਨਾ ਨਾ ਫੇਰੋ ਸਿਬਲੋ ਫੇਰੋ ਉੱਥੇ ਜਾ ਕੇ ਸਿਬਲੋ ਇਸ ਕਰਕੇ ਸਿਬਲੋ ਦੀ ਭਗਤੀ ਵਧੀ ਜਿਵੇਂ ਜਪ ਜਪ ਨੂੰ ਭਗਤੀ ਵਧੀ ਜੀ ਹੋਇਆ ਸਿਬਲੋ ਦੀ ਭਗਤੀ ਸੁਧਾਇਆ ਉਹਨਾਂ ਨੇ ਵੀ ਵਾਲਾ ਕਾਲੀ ਸਿੱਧਾ ਹੀ ਫੜ ਲੈਂਦੇ ਨੇ ਫਤ ਹਾੜੀ ਕਹਾਦਾ ਉਹ ਕਾਲੀ ਪਤਾ ਇਹਦੇ ਫਾੜੀ ਪਕਤੀ ਦਾ ਹੈ ਨਹੀਂ ਕਿਤੇ ਬਣਾ ਹੋਣੀ ਦੇ ਵਿੱਚ ਉਹ ਤਾਂ ਪਹਿਲਾਂ ਅਵਰ ਕਾਮ ਹੀ ਹੜਾਏਗੀ ਇਹਦੇ ਬਨਦਾ ਅਵਰ ਕਾਮ ਹੀ ਹੈ ਅਵਰ ਕਾਮ ਨੂੰ ਪੁੱਛੀ ਗੱਲ ਐਨਾ ਪਤਾ ਲੱਗ ਗਿਆ ਵੀ ਭਗਤੀ ਆਉਂਦੀ ਆਉਂਦੀ ਉਹ ਛੜਤੀ ਤੂੰ ਜੇ ਸ਼ੁਰੂ ਕਰੂਗਾ ਸ਼ੁਰੂ ਕਰਕੇ ਅਖਰ ਤੱਕ ਨੀ ਕਹ ਹੈ ਤਾਂ ਤੇ ਲੂਗਾ ਉਹਦੇ ਸਿਬਲ ਅਗਲੀ ਭੁਲਾਈ میرے دو پادાર્થ رہ گئے انہاں تک پہنچ پوس لے کوئے چالو ایک تے بعد اگڑن تک دی ایہی گل ہے اسグル وچ ہے ہر شمرن کر بھگت پرگٹائے ہر شمرن لگے বেদ اپائے ہر جو اندو ہر شمرن لگے বেদ اپائے ہر شمرن لگے বেদ বেদ اپائے اں نے বেদ ग्रंथ لکھے نے ਦੁਨੀਆਦੂ ਇਹ ਵੀ ਆਰ ਸਿਮਣ ਵਾਸਤੇ ਲਿਖਿਆ ਨੇ ਜਦ ਨਾ ਹੋਣ ਬੋਲਣ ਵਾਲੇ ਨਾ ਹੋਣ ਪਿੱਛੋਂ ਦੇਖੋ ਖੋਜ ਖਾਜ ਲੈਂਦੇ ਨੇ ਜੇ ਪਾਲਣ ਦਾ ਨਾਮ ਜੇ ਲਿਖਣ ਵਾਸਤੇ ਫੇਰ ਲਿਖਣ ਨਾ ਕੋ ਇਹ ਸਮਣ ਵਾਲੀ ਗੱਲ ਲਿਖੀ ਹੋਈ ਆ ਤੁਹੀ ਤਾਂ ਜਾਣਦੇ ਹੀ ਨੇ ਸਾਰੇ ਤੁਹੀ ਤਾਂ ਜਾਣਦੇ ਹੀ ਨੇ ਗੱਲ ਤਾਂ ਦੇ ਦੀਆ ਤੁਸੀਂ ਗੱਲ ਦੋ ਕਲਾਸਾਂ ਦੀ ਨਾ ਕਰੋ ਪ੍ਰਾਇਮਰੀ ਦੀ ਗੱਲ ਨਾ ਕਰੋ ਉਹ ਗੱਲ ਤੁਸੀਂ ਹਾਈ ਸਕੂਲ ਦੀ ਕਰੀ ਪਊਗੀ ਪ੍ਰਾਇਮਰੀ ਕਿਸੇ ਹਾਈ ਸਕੂਲ ਦਾਖਲਾ ਕਰੇਗਾ ਕਦੇ ਨਹੀਂ ਹਾਂ ਆ ਗਿਆ ਹੈ ਅਸਲ ਤੇ ਜਿਹੜਾ ਕਾਰਜ ਪੂਰਾ ਹੋਊਗਾ ਪੂਰੇ ਕਾਰਜ ਬਾਅਦ ਚਾਹੇ ਕਿਵੇਂ ਬੜੇ ਪਹਿਲੇ ਪੂਰੀ ਗੱਲ ਵਾਣ ਪੜਾਵਾ ਰੰਗਰ ਜੰਦੀ ਦੀ ਗੱਲ ਆਈ ਹੈ ਆ ਰੰਗਰ ਜੰਦਾ ਹਾਂ ਆਪ ਕੋ ਸਾਜਰ ਆਇਆ ਵੀ ਹੈ ਨੇ ਚਾਰੇ ਪੜਾ ਦੇ ਬਿਚਾਰੇ ਪੜਾ ਦੇ ਤੇ ਭੇ ਸਿੱਧ ਜਤੀ ਦਾਤੇ ਹਰ ਭੇ ਸਿੱਧ ਜਤੀ ਦਾ ਹਰ ਸਿਮਰਨ ਦਾ ਰਹੀ ਸਿੱਧ ਜਤੀ ਭੇ ਇੱਥੇ ਅਟਕ ਗਏ ਜਾ ਕੇ ਸੁਤੋਖੀ ਆਦਮੀ ਜਦੋਂ ਕਿ ਘਾਹੋਂ ਵਧੇ ਇਹਨੂੰ ਤਾਂ ਸੁਤੋਖੀ ਆਦਮੀ ਨੂੰ ਜੂੜੀ ਨਹੀਂ ਕਰਦਾ ਅੰਗਰੋ ਪਰ ਹਮੇਸ਼ਾ ਵੀ ਹੋ ਸਕਦਾ ਹੈ ਸੁਤੋਖੀ ਆਦਮੀ ਜੇ ਤਰਕਤਾੰਤਰ ਕਰਦਾ ਤਾਂ ਘਾਹੋਂ ਦਾ ਸਮਾਹ ਹੋ ਜਾਣਾ ਫਿਰ ਸਮਾਣਾ ਫਿਰ ਮਵਾ ਫੜਦਾ ਫਿਰ ਸੰਸਾਦੀ ਕੜਾ ਲੀਕਾਂ ਉਹ ਸੁਵਣਾ ਪੜੇ ਕੇ ਤਾਂ ਸੰਤੋਖ ਤੋਂ ਪਹਿਲਾਂ ਜਪਾ ਛੇੜ ਲਿਆ ਸੰਤੋਖ ਹੀ ਪਹਿਲਾਂ ਜੇ ਉਹ ਉਚਾਰ ਕਰੇ ਵੀ ਮੈਂ ਧਾਰਮਿਕ ਹਾਂ ਉਥੇ ਕੱਪ ਦਾ ਧਾਰਮਿਕ ਖਾ ਨਹੀਂ ਸਕਦਾ ਕਿ ਲੋਕ ਕਰਦੇ ਹੀ ਨੇ ਧਰਮ ਦੇ ਕੰਮ ਤਾਂੋਂ ਕਰਦੇ ਹੀ ਨੇ ਲੋਕ ਅਸਰ ਕੁਦਰਤੋਂ ਨੇ ਇੱਛਾ ਦੇਣ ਦੀ ਹੈ ਉਹ ਉੱਥੇ ਤੱਕ ਤਾਂ ਉਹਦੇ ਆਪਣੇ ਨੂੰ ਦਰਦ ਹੀ ਸਭ ਕੁਝ ਪੈਦਾ ਹੋ ਗਿਆ ਜੀ ਚੁੱਪਾ ਬੱਦੂ ਜਾਂਦੇ ਠਿਠੋ ਜਾ ਕੇ ਪਤਾ ਹੀ ਨਹੀਂ ਲੱਗਦਾ ਹੁਣ ਕੀ ਕਰੀਏ ਕਾਹ ਕਰਨਾ ਚਾਹੀਏ ਉੱਥੇ ਜਾ ਕੇ ਸਾਨੂੰ ਬੇਚ ਜਾਈ ਇੱਥੇ ਸੰਤੋਖ ਦਾ ਵੀ ਪਤਾ ਨਹੀਂ ਲੱਗਦਾ ਵੀ ਆਹ ਬਿਮਾਰੀ ਕਿਉਂ ਕੋਰਤਸਾਈ ਬੋੜੀ ਕਿ ਤੋ ਮਿਰਕ ਪੜਦਾ ਹੈ ਚੋਰੀ ਇਸ ਸਬਕ ਨਾਲ ਕਰਕੇ ਹੀ ਬੇਦਗਨ ਸੁਪੈਗਾ ਕੀ ਹੈ ਜੀ ਬੇਦੋਪਾਇ ਕਿਹਾ ਸਮਰਸਾਸਤ ਰੋਪਾਇ ਦੀ ਕੋ ਬੇਦੋਪਾਇ ਚਾਂ ਦੇਣ ਵਾਲੀ ਗੱਲ ਹੈ ਸਮਰਸਾਸਤ ਰੋਪਾਇ ਯਾਰ ਬੋਲਿਆ ਮਾਪਾ ਦਾ ਦਿੱਤਾ ਸਾਡਾ ਸਾਥ ਕੁਛ ਨਹੀਂ ਬੇਦੋਪਾਇ ਥੱਲੇ ਬੇਦੋਪਾਇ ਬਹੁਤ ਚੜੂ ਬੇਦਿਕ ਕੋਈ ਕਿਹਾ ਹੈ ਚਾਰੇ ਵੇਦਾਂ ਦੀ ਗਿਆਨ ਵੀ ਹੈ ਆਵੀ ਵੇਦਨ ਜਿਹਦੇ ਗਿਆਨ ਮਿਗਰਤ ਨੇ ਸਭੇ ਦੇਨ ਤੋਂ ਆਤਮ ਗਿਆਨ ਦੇ ਹਨੇ ਕਰਨ ਨੂੰ ਬੇਦ ਕਰਦੇ। ਬੇਦਾਮਾ ਨਾਮੁਤਮ ਨਾਮ ਨਾਮੁਤਮ ਉਹ ਬੇਦ। ਜਿਹਨੂੰ ਤੱਤ ਗਿਆਨ ਨੂੰ ਨਾਮ ਰੂਪ ਸਭ ਤੋਂ ਉੱਚਾ ਉਹ ਜਿਹੜੇ ਗ੍ਰੰਥ ਵਿੱਚ ਉਹ ਬੇਦ। ਬੇਦਾਮੇ ਰੂਪਤਮ ਸੋ ਸੁਬੇਗਾ ਹੀ ਫਰੇ ਜੋ ਬੇਦਾਲੇ। ਬਹੁਤ ਸਭ ਦਾ ਤਾਂ ਸਪਸ਼ਟ ਹੈ ਬਲੋ ਸਾਹ ਦੇ ਪੱਤਿਆਂ ਨਾਲ ਲਾ ਕੇ ਨੁਕਤੇ ਤੂੰ ਫੇਰ ਦੱਤਾ ਜਾਂਦਾ ਹੈ ਸੌਖਾ ਦੀ ਜਾਂਦਾ ਹਾਂਜੀ ਹਰ ਜਤੀ ਦਾਤੇ ਆ ਕੇ ਅਟਕ ਗਏ ਰੋ ਤੇਰੀ ਸਭ ਲੱਗੇ ਧੀ ਗਾਂਧੀ ਹਾਂ ਜਮਨ ਨੂੰ ਭਾਏ ਹਰ ਸਬੰਧ ਕਰਕੇ ਹੀ ਸਤਿ ਅਤੀਤ ਆਤੇ ਬਣੇ ਸਦਾ ਜਿਕੇ ਵਾਸਤੇ ਕਾਂ ਕਰ ਛੱਡਿਆ ਸੀ ਸੰਤੋਖ ਹੀ ਘਰੇ ਬਣ ਜਾਂਦਾ ਸਮਝਾਓ ਨੀਚੇ ਅੱਗੇ ਚੱਲ ਜੀ ਤੋਂ ਅੱਗੇ ਚਲੇ ਆਹੋ ਅੱਗੇ ਸੰਸਾਰ ਤੇ ਅਗੜੂਮ ਆਇਆ ਤੇ ਕੇ ਤਾਂ ਸਤਿ ਅਤੀਤ ਆਤੇ ਅਗੈ ਚੋ ਤੇ ਉਹਨੂੰ ਸਿਮਰਨ ਬਾਸ ਤੇ ਹੈ ਸਿਮਰਨ ਬਾਸ ਤੇ ਜੇਪਣ ਤੋੜਦਾ ਗਿਆ ਨਾ ਫੇ ਮਾਇਆ ਨੂੰ ਤੋੜਦਾ ਨਾ ਮਾਇਆ ਤੋਂ ਉੱਚਾ ਉੜਦਾ ਮਾਇਆ ਵਿੱਚੋਂ ਦਸਹੀ ਹੋਣ ਵਾਸਤੇ ਮਾਇਆ ਵਿੱਚੋਂ ਦਸਹੀ ਹੋਣ ਦੀ ਉਹ ਸਭ ਜੋ ਜाहिर ਕਰਨ ਵਾਸਤੇ ਕਹ ਲੋ ਮਾਇਆ ਵਿੱਚੋਂ ਦਸਹੀ ਹੁਣ ਚੱਲਿਆ गीता ने क्या विशेषता जति जाते हो ना मारा है जब मैं ये नहीं गया मैं ताव माने नहीं सके ठीक है सब लोग नोटिस गीता ना गीता होता हूं तू जी दे पर ये भी ऐसे बसते हैं पढ़ने से बसते हैं पढ़ने से बसते हैं पर करते नहीं करते नहीं है ना इसकी बसती है सब हैं ओ आदमी ਇਪੜੀ ਗਲਤੀ ਨਹੀਂ ਕੀਤੀ ਉਹਨਾਂ ਤੇ ਇਹ ਸੇ ਬਾਤ ਹੈ ਕਿ ਜੀ ਉਹ ਤੁਸੀਂ ਇਹ ਰੰਗ ਦਾ ਕਰਨਾ ਭਾਈ ਜੀ ਸਹੀ ਕਰਦੇ ਤਾਂ ਕਿਉਂ ਨਹੀਂ ਕਰਦੇ ਇਹ ਤਾਂ 1.5% ਲਾ ਦੇਉਣਾ ਕੁਝ ਨਹੀਂ ਗਿਆ ਆਪਣਾ ਥੋੜੇ ਤਾਂ ਹਰ ਹਾਂ ਚੱਲੇਗੇ ਹਰ ਗੋੜੇ ਹਾਂ ਚੱਲੇਗਾ ਉਹ ਸਰ ਸ਼ਮਰਨ ਨੀਚ ਚੌਂਕ ਉੱਤੇ ਜਾਂਦੇ ਸਰ ਜਮਾਨਾ ਵਾਲੇ ਹੁੰਦੇ ਨੇ ਉਹ ਵਿਚਾਰਾਂ ਕੋਲ ਨਾਲ ਜੇ ਲੱਗਦੇ ਚਾਰਾਂ ਕੋਟਾਂ ਜਾਣੇ ਜਾਂਦੇ ਦੇਖੋ ਨਾ ਵਾਲਮੀ ਘਰੋਂ ਚਾਰਾਂ ਕੋਟਾਂ ਜਾਣਦਾ ਨਹੀਂ ਵੀ ਜਗਾ ਇਹ ਪੈਦਾ ਹੋਇਆ ਲਖਿਆ ਸੀ ਕਾਦਵੀਓ ਵਾਲਮੀ ਕੋਲ ਜਿਹੜਾ ਕਹਤਾ ਸੀ ਪਤਾ ਹੀ ਆਪਨ ਕਾਲੀ ਰਾਜਾ ਵੀ ਉਹ ਘਰ ਉਹ ਉਹਨਾਂ ਦਾ ਹੀ ਸੀ ਐਜਾ ਕੁਛ ਹੈ ਸਾਡੇ ਕੋਲ ਉਹ ਵਿਦੇਦਾਸਰ ਤੇ ਬੁੱਧ ਜੀ ਉਹਨਾਂ ਨੇ ਵਿਦੇਦਾਸਰ ਸੱਬਦ ਕੀਤਾ ਥਲੇ ਦੇ ਪਤਲ ਤੇ ਲਿਆ ਗੁਰ ਥਲੇ ਸੇ ਬੁੱਧ ਕਰੇ ਸੂਤੋਕ ਤੋਕ ਤੱਕ ਅਗਲੇ ਤੱਕ ਤਾਂ ਜੀ ਬੁੱਧਰ ਤੇ ਖੜਾ ਹੈ ਜੀ ਤੱਕ ਤਾਂ ਇੱਕ ਬੁੱਧਰ ਥਲੇ ਖੜਾ ਹੈ ਕਿ ਦੂਜਾ ਥਲੇ ਦਾ ਵੀ ਨੇ ਹੈ ਇੱਕ ਬੁੱਧ ਜੀ ਰਹਿੰਦੀ ਹੈ ਹਰ ਸਿਮਰਨ ਤਾਰੇ ਸ਼ਬਦ ਧਰਨਾ ਹਰ ਜਨਨ ਵਾਸਤੇ ਇਹ ਸਾਰੀ ਸ੍ਰਿਸ਼ਟੀ ਬਣਾਈ ਹੈ ਕੋਈ ਕੀਤਾ ਤੇ ਅੱਜ ਲੱਖ ਜੂਮ ਨੇ ਕਾਰਜ ਕੀਤੀ ਹੈ 84 ਲੱਖ ਜੂਮ ਚਾਰ ਜਮਣ ਨੇ ਕਾਰਜ ਸਭ ਆ ਗਿਆ ਸੰਦਨ ਨਾਲੇ ਜੀ ਹਾਂ ਹਰੀ ਰਚਨਾ ਹਰੀ ਰਚਨਾ ਹਰੀ ਤੋਂ ਆਖਰ ਸਿਮਰਨ ਕਾਰਨ ਹੈ ਜੀ ਹਰ ਸਿਮਰਉ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਇਸਾਰੇ ਕਹਿੰਦੇ ਸਵੱਲਾ ਅਧਾਰਾ ਕੋਈ ਜਗਾ ਹੈ ਨਾ ਪਹਿਲਾ ਜਿੱਦਨੇ ਜੋੜੀਆਂ ਭੁਗਤਿਆ ਫਿਰ ਲੱਗੇ ਭੁਗਤੀਆਂ ਸਵੱਲਾ ਸਵੱਲਾ ਕਾਰ ਕਾਰ ਜਿਹੜਾ ਹੈ ਕਾਰ ਨੂੰ ਸੀ ਜਿਹੜਾ 84 ਲੱਖ ਜਿੰਤਾ ਕਾਰ ਨੂੰ ਸੀ ਐਸਬਨ ਸੀ ਇਹਨੂੰ ਕਰਨਾ ਹੈ ਕਰਨਾ ਹੁਣ ਕਰਨਾ ਹੈ ਸਮਰ ਸਮਰ ਕਹੋ ਜਿਹੜਾ ਕਾਰਡ ਸੀ ਉਹ ਕਾਰਡ ਉਹ ਹੁਣ ਆਇਆ ਉਹਦਾ ਕਰਨ ਦਾ ਮੌਕਾ ਮੌਕਾ ਹੁਣ ਹੈ ਜਿਹਦੇ ਵਾਸਤੇ ਲੱਖ ਚੋਂ ਆ ਆ ਹੁਣ ਸਮ ਆਇਆ ਉਹ ਕਰਦਾ ਸੂਦੇ ਹੀ ਭਾਜ ਹਲਕੀ ਫੇਵ ਜਨ ਹਾਂ ਅਗਲੀ ਬੰਦਗੀ ਜਾਗੇ ਕੀ ਉਹ ਅਗਲਾ ਕਾਰਾ ਬੋਲ ਰਿਹਾ ਕੋ ਆ ਦੇ ਲਾ ਆ ਗਿਆ ਗਿਆ ਆ ਪਤਾ ਲੱਗਦਾ ਵੀ ਸੌਣ ਚਾਉਣ ਲੱਗ ਗਿਆ ਹਾਂ ਆਏ ਹੋਏ ਤੁਹ ਪੜੇਰ ਸਗਦਾ ਕਾਰ ਬਿਲਕੁਲ ਸਪਸ਼ਟ ਗੱਲ ਐ ਪੰਪ ਇਸ ਵਾਰ ਪਹਿਲਾਂ ਇਸ ਜੀ ਉਹ ਮੈਂ ਦੱਸਦਾ ਸੀ ਲੱਗ ਰਿਹਾ ਕੋਲ ਕੱਲ ਹੀ ਸੀ ਏ ਜਦ ਵੀ ਥੱਲੇ ਆ ਕੇ ਕਹਤੀ ਹੋ ਉਹ ਉਹ ਸਪਸ਼ਟ ਕਰਦੀ ਹਰ ਸਿਮਰਨ ਕੀ ਉਹ ਸਗਲਾ ਆਕਾਰਾ ਹਾਂ ਸਾਰਾ ਉਹਦੇ ਜੜ ਤੇ ਤੋਂ ਦੇਖੋ ਉਹਦੇ ਸੀ ਇਹ ਦੁਨੀਆ ਬੋਕੀਆਂ ਨੇ ਧਰਤੀ ਤੁਸੀਂ ਹੋ ਜਿਹੜਾ ਕੋ ਬਣਾਇਆ ਪਾਉਣ ਪਾਣੀ ਇਹਦੇ ਚ ਇਹ ਆ ਗਿਆ ਆਕਾਰਾ ਆ ਗਿਆ ਪਸਦੀ ਉਹੀ ਦੀ ਗਈ ਉਹਦੇ ਨਾਲ ਜਿਆਦਾ ਦੋ ਲਿਮੇਟ ਲੈ ਕੋੜਾ ਹੋੜ ਕੇ ਲਾ ਕੇ ਹਰ ਸਵਰਨ ਨੇ ਆਪ ਨੇ ਆਪ ਨਰ ਕਰਾ ਬਈ ਉਹਨਾਂ ਸਵਰਨ ਦੇ ਪਿਤਾ ਆਪ ਹੀ ਲਪੂਗਾ ਇਸ ਕਰਕੇ ਇਹ ਸਵਰਨ ਜਿਹੜਾ ਹੈ ਉਹਦੇ ਚ ਹੈ ਬਈ ਇਹਦੇ ਪਿੱਛੇ ਕੌਣ ਹੈ ਸਭਾ ਹੀ ਸਾਡੇ ਖਾਤਰ ਚਲੋ ਜੁਨਾ ਭੁਗੀਆਂ ਸਵਰਨ ਬਾਸ ਉਹ ਜਿਹੜਾ ਪਿੱਛੇ ਐ ਸਭ ਕੁਝ ਕਰਨ ਵਾਲਾ ਅਸੰਚ ਉਹ ਕੌਣ ਹੈ ਉਹ ਨੰਕਾਰ ਆ ਇਹ ਸਿਮਨ ਕਰਦੇ ਕਰਦੇ ਹੀ ਵਿੱਚੋਂ ਨੰਕਾਰ ਆ ਡਬੜੇ ਜਿਹੜਾ ਇਹ ਕਿੱਥੇ ਕੌਣ ਜਾਣ ਆ ਬਿਲ ਉਤਾਰ ਹੋ ਗਿਆ ਲੋਕ ਇਸ ਦੇ ਲੱਗਿਆ ਹੋਇ ਉਤਾਰਾ ਸਰਬਾਨਵ ਅਸਮੰਦ ਵਿੱਚ ਸਿਮਨ ਕਲਵਾੜਾ ਹੀ ਦੁਨਸਾਰਾ ਆਪ ਦੁਨਸਾਰਾ ਉੱਠੀ ਰਾਇਆ ਸੇ ਮਾਲਕ ਜਨਾ ਆਪੀਂ ਦੁਨਸਾਰਾ ਸਮਝ ਲੱਗਿਆ ਆਪ ਦੁਨਸਾਰਾ ਹੀ ਹੋਉਂਦੇ ਇਹ ਕੋ ਕਿ ਲਿਖਿਆ ਹੋਇਆ ਇਹ ਹੀ ਹੁੰਦਾ ਨਗਾਕਾਰੇ ਬਿਲਦਾਰ ਹੁੰਦਾ ਦੌੜੇ ਸਰਕਾਰ ਜੇ ਕਾਰਨ ਹੋਊਗਾ ਹਾਸੇ ਮੈਂ ਆਪ ਨੂੰ ਨੰਕਾਰਾ ਹਾਂ ਸਭੁੱਤ ਤੇ ਜਿਹੜਾ ਲੱਗਿਆ ਆਇਆ ਹੈ ਇਹ ਕਿੱਥੇ ਪਹੁੰਚਦਾ ਆਪ ਨੂੰ ਨੰਕਾਰਾ ਹੋ ਜਾਂਦਾ ਹੈ ਹੀ ਹੁੰਦਾ ਹੋ ਜਦੋਂ ਸਭੁੱਤ ਬਚਿਆ ਹੋਵੇ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰੂ ਕੀ ਹਰਿ ਸਿਮਰਨ ਤੇ ਨਹੀਂ ਪਾਇਆ ਇਹ ਤੇ ਕਿਰਪਾ ਕਰ ਲੀ ਜੀ ਨੇ ਇਹ ਬੇਦਬਖਿਲੇ ਆ। ਖਾਲਸਾ ਮੰਗਰ ਮੈਂ ਅਬਦੁੱਲ ਤਾਰਾ ਜੀ ਦੀ ਗੱਲ ਕਹਿਤੀ। ਇਹ ਕਿਰਪਾ ਬਣਾਣੀ ਹੁਣ ਸਮਝ ਆਉਣੀ। ਇਹ ਤੇ ਵਿਸ਼ਵਾਸ ਜੁੜਦੇ ਨੇ। ਇਹ ਤੇ ਬਰੋ ਸਭ ਲੋਕ ਨੂੰ ਪਸੰਦ ਆ। ਸੱਚੀ ਹੈ ਭਾਈ। ਸੱਚੀ ਹੈ। ਇਹ ਗੱਲ ਨਹੀਂ ਬਦਲੂ ਤੇ ਆਰ ਵਿੱਚ ਦੁਸਤਾਰਾ ਆਦਮੀ ਹੁੰਦਾ ਨਹੀਂ ਹੋ ਸਕਦਾ ਕਿਉਂਕਿ ਕਦੇ ਸੋਚਿਆ ਹੀ ਨਹੀਂ ਤਾ ਦੱਸਿਆ ਹੋਇਆ ਹੋਰ ਸੋਇਂ ਬੁੜਕੇ ਤੂੰ ਪਿਆਜਾ ਕੋ ਕਹਿਤਾ ਔਰ ਤਾਂ ਠੀਕ ਹੈ ਪਰ ਵਿਸ਼ਵਾਸ ਕਰਨ ਨੂੰ ਕਿਹਦਾ ਡਰ ਜਿਆ ਲੱਗਦਾ ਵਿਸ਼ਵਾਸ ਕਰਨ ਤੇ ਡਰ ਜਿਆ ਭੈ ਜੀ ਲੱਗਦੀ ਕੁਝ ਬਾਤ ਕਰਦੇ ਭੈ ਜਿਆ ਲੱਗਦਾ ਸਹਿ ਲੱਗਦਾ ਧਰਾਈ ਵੀ ਹੋਏ ਅੰਦਰੇ ਵੀ ਹੋਈ ਜੋ ਵੀ ਹਾਂ ਕਾ ਨਾ ਉਹ ਬੋਲਦਾ ਰਹੇ ਪਰ ਉਹਨਾਂ ਸਹਾਂ ਨੂੰ ਦੇਖਣਾ ਨਹੀਂ ਪੈ ਰੋਣ ਤੋਂ ਚਪੈ ਦੀ ਮੰਤਾ ਕੋਈ ਕਿਸੇ ਕਿਸਮ ਦੀ ਮਾ ਕੇ ਸਾਨੂੰ ਪਾਇ ਦਿੱਤਾ ਹੈ ਪਰ ਪਾਇ ਨਹੀਂ ਮੰਤਾ ਨੰਤਾਰੇ ਹੋਰ ਨਹੀਂ ਕੋਈ ਕਾਇ ਉੱਥੇ ਵੀ ਗਏ ਪਤਾ ਲੱਗਿਆ ਨਾਪ ਨਾਪੇ ਪੰਤਾ ਉਥੇ ਜਿਹੜਾ ਪੰਦੀ ਪਉਂਦੀ ਹੈ ਸਭ ਨੇ ਬੋਲੇ ਜੈ ਸੰਦੇਖ ਮਾਨਵ ਜੀ ਨੂੰ ਬੋ ਨਿਰੰਕਾਰ ਸੱਚੇ ਇੱਕ ਉਤਪਤ ਨਿਰੰਕਾਰ ਸੱਚੇ ਕਾਇਰ ਹੋ ਜਾਣਾ ਸਗਲਿਆਂ ਮੋਜਲਾ ਸਗਲੇ ਸਾਰੀ ਜਿਹੜੀ ਪੌੜੀ ਹੈ ਉਹਦੇ ਵਿੱਚ ਸਾਰੀ ਰੱਜਣਾ ਜੜੀ ਹੋਈ ਹੈ ਭੈ ਵਿੱਚ ਧੂਰ ਭੈ ਵਿੱਚ ਚਲ ਜੂ ਬਹੁਤ ਉੱਥੇ ਤੱਕ ਰੱਜਣਾ ਜੜੀ ਹੋਈ ਹੈ ਉਥੇ ਗੁਰਮੁਖਥੇ ਗੁਰਮਾਇਆ ਹੀ ਨਾ ਰਵਿਚੇ ਉਹਦਾ ਦਾੜੇ ਦਾ ਲਈ ਹੋ ਗਿਆ। ਇਹ ਗਾਣਾ ਨਹੀਂ ਸਰ। ਸੱਚੇ ਇੱਕ ਦਾਸ ਨਾਲ ਨਭ ਜਵੇ ਨਾ ਇਹ ਨਹੀਂ ਉਹ ਪਹੁੰਚਾ। ਉਹ ਪਹੁੰਚੇ। ਦਾੜ ਦਾ ਆ ਗਿਆ। ਜੇ ਇੱਕ ਹੋ ਗਈ ਮਿਰਪਾ ਦਾ ਹੁੰਦਾ ਗੱਲ ਹੋਇਆ ਜਿਹਨੂੰ ਕਹਿੰਦੇ ਇੱਕ ਹੋ ਕੇ ਤਾਂ ਸਮਾਨ ਇਤ ਹੋ ਕੇ ਸਭ ਨੂੰ ਹੋਣਾ ਨਾਂਕਾਰ ਹੋਣ ਦਾ ਪਰਮਾਤੂਰ ਹੋਣਾ ਨਾਂਕਾਰ ਹੋਣ ਦਾ ਪਰਮ ਦੂਰ ਹੋਣਾ ਜਦ ਜਦੋਂ ਉਹ ਪਰਮ ਦੂਰ ਹੋਣਾ ਉਦੋਂ ਨੇ ਮਨ ਮੰਨਦਾ ਪਰਮ ਜਾਲ ਨਾਂ ਤਰਪੋਰ ਹੋਰ ਕਹਤੇ ਰਾਮ ਫਿਰ ਹੋ ਗਈ ਹੈ ਜੋਦਕਾਰ ਮੇਰੇ ਪਾਉ ਹੈ ਪਰਮੇਸ਼ਰ ਦੀ ਅਦਾਰਤ ਹੈ ਬਿਲਕੁਲ ਹੂੰ ਕਹ ਰਹਾ ਆਪੇ ਹੈ ਮਿਸਰ ਕਤੇ ਪਾਉ ਇੱਕ ਨਾ ਨਿਰ ਪਾਉ ਲ ਗਿਆ ਦਾ ਨਾ ਹੋਣਾ ਹੀ ਹੈ ਸਾਰੇ ਕਿਤੇ ਇੱਕ ਦਾ ਹੀ ਆ ਕੋਈ ਇੱਕ ਦਾ ਹੋਣਾ ਹੋਰ ਅੱਛੇ ਇੱਕ ਸਾਕੇ ਇੱਕ ਕਿਆ ਇਹ ਕਹਿ ਨਹੀਂ ਹੁਣ ਇਹਨੇ ਜਬਰਨ ਕੀ ਨੂੰ ਜਬਰਨ ਕੀ ਕਿਹਦੇ ਵੱਲ ਨਾਲ ਜਿਹਨੂੰ ਵੱਲ ਉਹ ਇਹ ਜੋ ਸੁੱਤਾ ਪਿਆ ਸੁਪਨਾ ਦੇਖਦਾ ਕੁਝ ਹੋਰ ਹੈ ਜਾਂ ਜਾਗਦਾ ਕੁਝ ਹੋਰ ਹੈ ਸੁੱਤੇ ਜਾਂ ਜਾਗਦੇ ਦਾ ਹੀ ਫਰਕ ਆ ਸੋ ਤੇ ਬਾਦੀ ਦੁਨੀਆ ਹੋ ਰਹੀ ਆਪਣੇ ਆਪ ਨੂੰ ਕੁਝ ਹੋਰ ਸਮਝਦਾ ਜਿਹੜਾ ਅਸਲੀ ਸਿਰੀਆ ਉਹਦੇ ਕੋਲ ਹੈ ਹੀ ਨਹੀਂ ਉਹ ਨਗਲੀਲਾ ਹੀ ਫਰਕ ਦੁਨੀਆ ਵੀ ਨਕਲੀ ਹੈ ਜਾਗਦਾ ਫਿਰ ਕੁਛ ਜਾਗਦਾ ਉਹ ਜਿਹੜਾ ਹੈ ਉਹ ਕਰ ਰਿਹਾ ਸੁਪਨੇ ਵੀ ਆ ਬਖਰੀ ਸੁਪਨੇ ਵੀ ਆ ਬਖਰੀ ਉਪਕਾਰੀ ਨਾ ਆਂਕਾਰੀ ਕਿਵੇਂ ਬਣ ਜਵੇ ਉਸਦਾ ਹੁਕਮ ਲੱਗੂਆ ਉਹਦਾ ਵੀ ਕੰਪੈਨੀ ਲੱਗਦਾ ਜਿਹੜਾ ਇੱਕ ਹੈ ਸਭ ਵਿੱਚ ਇੱਕ ਥੱਲੇ ਆ ਉਹ ਸਾਰਿਆਂ ਤੋਂ ਜਿਹੜਾ ਇੱਕ ਹੈ ਇੱਕ ਉਹ ਹੈ ਕਿ ਸੁਪਰੀਮ ਪਾਵਰ ਦਾ ਨਹੀਂ ਪਰਮੇਸ਼ਰ ਵੀ ਹੈ ਜੀ ਉਦਾਹਰ ਪਰਮੇਸ਼ਰ ਵੀ ਇਹੀ ਹੈ ਜਦੋਂ ਆਡੋ ਹੋ ਕੇ ਤਾਂ ਨਹੀਂ ਜਨ ਤੁਮ ਨਹੀਂ ਜਦੋਂ ਇਹ ਗਾਡ ਹੋ ਕੇ ਤੁਮ ਨਹੀਂ ਇਹ ਪੂਰਨ ਪਰਮੇਸ਼ਰ ਲੱਗਿਆ ਨਹੀਂ ਹੋਇਆ ਕੋਲਡ ਪਰਮੇਸ਼ਰ ਨਹੀਂ ਕੋਲਡ ਲਗਾ ਲੱਗਿਆ ਫਿਰ ਉਹ ਤਾਂ ਕੋਲਡ ਪਰਮੇਸ਼ਰ ਦਾ ਪ੍ਰਿਪਰੇਸ਼ਨ ਵੀ ਹੋਇਆ ਹੈ ਕੋਈ ਹੋ ਗਿਆ ਹੈ ਅਰਬੀ ਸੇ ਭਗਤ ਬਰਾਬਰ ਹੋਣਾ ਕੋਈ ਨਹੀਂ ਸ਼ਾਹੀ ਹੋਇਆ ਅਰਬੀ ਸੇ ਫਿਰ ਉਹ ਪਰਮਈਸ਼ਵਰ ਨੂੰ ਕਹਿੰਦੇ ਨੇ ਇਸਤਤਾ ਪਹਿਲਾ ਹੀ ਆ ਹੈ ਬ੍ਰਭੂ ਇਸਰ ਕਹਿੰਦੇ ਨੇ ਨਾਮ ਕਹਿੰਦੇ ਸੀ ਇਹ ਹੋਰ ਰਹਾ ਹੈ ਆ ਤੇ ਉਹ ਮਤ ਹੈ ਲੱਗਿਆ ਫਿਰ ਉਹ ਜਿਹੜੀ ਇਹ ਕੱਲਾ ਪਰਮੈਸ਼ਰ ਕੱਲਾ ਉਹਨੂੰ ਪਰਮੇਸ਼ਰ ਵੀ ਕਹਤਾ ਜੇ ਹੁਕਮ ਕਰ ਲੈਣੂਗਾ ਤਾਂ ਕੋਲ ਪਰਮੇਸ਼ਰ ਦਾ ਪਸਾਰਿਆਂ ਦਾ ਜਿਹੜਾ ਇੱਕ ਆ ਉਹਨਾਂ ਕੋਲ ਪਰਮੇਸ਼ਰ ਹੀ ਆ। ਯਾਨੀ ਫੇਰ ਉਹ ਤਾਂ ਕੁਝ ਨਹੀਂ ਰੱਖੀ ਗਿਆ। ਜਦੋਂ ਉਹ ਗਿਆ ਹੋਇਆ ਫਿਰ ਕੀ ਦਈਏ। ਤੇ ਕਹੋਗੇ ਉਹ ਫੇਰ ਉਹ ਕਮਤੀ ਕਰੀਏ। ਉਹ ਸਰਬੋ ਰੂਤੀ ਜਦੋਂ ਆਉਨੇ ਆ। ਇਹ ਵੀ ਤਾਂ ਹੋਈਏ ਬਸ। ਉਹ ਸਹੀ ਕਹਤਾ ਪਰਮ ਗਿਆ ਨਹੀਂ ਆਪਰਮੇਸ਼ਰ ਰੱਖਿਆ ਗਿਆ ਕਿ ਫੇਰ ਦੇਖਿਆ ਜੀ। ਗੋਲਡੀ ਗਵਾ ਨੰਬਿਆ। ਅਸਲੇ ਆਪ ਤੇ ਪਪੇ ਨੂੰ ਸਿਹਾਈ ਲੱਗੀ ਆ। ਆਪ ਹੀ ਉਹਦਾ ਸਬੰਧ ਹੈ ਜਿਹੜਾ ਕਹਿੰਦੀ ਕਰਨਾ ਪੋੜਾ ਰੱਬ ਜਿਹੜਾ ਆਪ ਹੀ ਪਰਮੇਸ਼ਰ ਹੈ ਆਪ ਹੀ ਫਿਰ ਉਹ ਵੀ ਇਹੀ ਹੈ ਉਹ ਤਾਂ ਪੂਰਨ ਪਰਮੇਸ਼ਰ ਦਾ ਹਾਂ ਦਾ ਗਿਆ ਹੈ ਉਹਨੂੰ ਪਰਮੇਸ਼ਰ ਦਾ ਫਿਰ ਕੀ ਕੱਥੇ ਹੋਇਆ ਹਾ ਆਰ ਪੂਰਨ ਪਰਮੇਸ਼ਰ ਆਇਆ ਨਾ ਆਰਬ ਨੂੰ ਕੋਈ ਪੂਰਨਾ ਹੈ ਗੁਰਜੀਤ ਵੀ ਫਸਰ ਨਹੀਂ ਕਰਦਾ ਸੀ ਨਾਨਕ ਗੁਰਮੁਖ ਨੇ ਸੋਈ ਜਿਓ ਹਾਂ ਗੁਰ ਤਾਂ ਫਿਰ ਹੋਈ ਹੈ ਇਹਦਾ ਹੋਰ ਹੋਈ ਹੈ ਇਹ ਤੋਂ ਕਹਿੰਦਾ ਉਹੀ ਹੈ ਉਹ ਬਣਾਉਂਦਾ ਤਾਂ ਬੋਲਦਾ ਇਹਨੂੰ ਉਹ ਮਿਲਦਾ ਗਿਆ ਉਹ ਬਣਾਉਂਦਾ ਇਹ ਬੋਲਦਾ ਗੁਰਬਿਲਾ ਸੋਈ ਜਿਓ ਵੀ ਕਹੂਗਾ ਤਾਂ ਜਿਹੜਾ ਨਾ ਹੋ ਗਿਆ ਅਨੁਮੇਦਨ ਜਾਂ ਦੂਗੂ ਗੁਰੂ ਕੇ ਹੋਇਆ ਲੋ। ਹੋ। ਸਰੀ ਕਿਰਪਾ ਜਿਸੋਂ ਆਪੋ ਬੁਝਾਇਆ। ਮੁੜ ਕੇ ਤੂੰ ਪਿਆ ਜਾ ਕੋ ਔਰ ਫਿਰ ਇੱਥੇ ਆ ਕੇ ਕਿ ਬਚੋਗੇ। ਕੀ ਤੂੰ ਕੀ ਹੈ ਜੋ ਸੁਪਰੀਮ ਪਾਵਰ ਕਹਿੰਦਾ ਸੀ ਕੋਈ ਤੂੰ ਬੰਦਾ ਸੀ। ਉਹੀ ਤੂੰ ਉਸ ਪਾਵਦਾ ਹਿੱਸਾ ਹੈ। ਇਹ ਫਾਇਦਾ ਸਾ ਪਾਵਦਾ ਹਿੱਸਾ ਹੈ। ਉਹ ਸਹੀ ਹੈ। ਉੱਥੇ ਕਿਹੜਾ ਫਰਕ ਹੈ? ਫਰਕ ਤਾਂ ਹੋਣੀ ਦੋਰੇ। ਇਹ ਕਰ ਅਨੇਕਾਂ ਫਿਰ ਅਨੇਕਾਂ ਕਰੇਗਾ। ਇਹ ਮੈਂ ਉੱਥੇ ਉੱਥੇ ਮਤਲਬ ਆ ਜੀ ਨਾ। ਕੋਈ ਮੁਰਕੇ ਤੂੰ ਪਿਆ ਜਿਹੜਾ ਲੱਗਦਾ ਇਹ ਨਹੀਂ ਤੁਸੀਂ ਕਹਿੰਦੇ ਵੀ ਸੈੱਟ ਕਰ ਸਕਦੇ ਹੋ ਹਾਂ ਬਹੁਤ ਔੜ ਜਾ ਖਤਰਨਾਕ ਗੱਲਾਂ ਕਹਿੰਦੇ ਕੇ ਗੁਰੂ ਜੀ ਨਾਲ ਕਿ ਮੇਰੀ ਛੋਟੀ ਜਵਾਂ ਨੇ ਇਹਦੇ ਪਾਣੀ ਸਭ ਦਾ ਜਿਹੜਾ ਹੈਗਾ ਉਹਦੀ ਉਹ ਮਿਆਖਾ ਹੋਣੀਗਾ ਉਹਨੇ ਛੋਟੀ ਗੱਲ ਕਹਿੰਦੇ ਗੁਰੂ ਆਂਦਰ ਬਹੁਤ ਜਿਆਦਾ ਵਿਸਾਰ ਕਰਕੇ ਸਮਝਾ ਇਹ ਵੀ ਗੱਲ ਉੱਥੋਂ ਜਿਹੜੇ ਨਹੀਂ ਸਮਝਾਦੇ ਨਾਲ ਲਾਈਕ ਇੱਥੇ ਸੁਖਬੀ ਸਾਹਿਬ ਦੇ ਸਰ ਸੋਖਾ ਉਹਨਾਂ ਦੇ ਅੰਦਰ ਗੁਜਿਆ ਕਰਨੇ ਨੇ ਤੇ ਵੀ ਨਾਂ ਕੋ ਉੱਥੇ ਵੀ ਦਾਸ ਹੈ ਤੇ ਸਵਾਲ ਇਹ ਕੀ ਦਾਸ ਹੈ ਕਿਉਂਕਿ ਉੱਥੇ ਕੋਈ ਇੱਕ ਜੇ ਲੈ ਉਹ ਦਾਸ ੱਲਾ ਸਾਰੀ ਤੁਸੀਂ ਦਾਸ ਹੈ ਸਾਰੀ ਦਾਸ ਦੀ ਕੋਮਨ ਸੱਤ ਉੱਥੇ ਫੋਕਾ ਸੱਤ ਫੋਕਾ ਮੈਂ ਜੱਤਾਂ ਦਾ ਨਹੀਂ ਸਾਰਿਆਂ ਦਾ ਹੀ ਹੈ ਸਾਰਿਆਂ ਬਾਤੇ ਸੱਤ ਹੈ ਸਾਰਿਆਂ ਦਾ ਹੀ ਹੈ ਉਹਦੇ ਕਿਸੇ ਨੂੰ ਇਤਰਾਜ਼ ਨਹੀਂ ਕਿਸੇ ਨੂੰ ਉਹਦੇ ਤੇ ਨਹੀਂ ਆ ਵੀ ਬੇਰਾਦੀ ਇਹਦੇ ਕੋਈ ਇਨਸਾਨ ਆ ਬੇਰੀ ਦੀ ਬਣੀ ਆ ਉਹ ਐ ਜਾ ਕੁਝ ਕੀ ਸਾਰਿਆਂ ਦੀ ਚਈਓ ਹੋਵੇ ਕਿਉਂਕਿ ਪਰਪਕਾਰੀ ਹੈ ਜਾਨੀ ਫਰਬ ਕਾਲ ਦੀ ਇੱਛਾ ਹੈ ਕੁਝ ਦਾ ਜੀਤਾ ਉਹ ਹੈ ਹੀ ਨਹੀਂ ਸਰਪੇਤਾ ਹੀ ਕੀ ਚਿੰਤਾ ਦੇ ਸਮਗਮ ਆਏ ਨੇ ਕਾਤਾ ਚਿੱਤਾਂ ਜੋਆਂ ਦੀਏ ਆਪਣੀ ਰਹਿ ਨਹੀਂ ਕੋਈ ਉਹ ਜਿਹੜਾ ਜਾਗ ਨਹੀਂ ਜਾਗੇ ਉਹਨਾਂ ਦੀ ਉਹ ਚਿੰਤਾ ਉਹਨਾਂ ਦੀ ਆਪਣੀ ਗੱਲ ਦੀ ਚਿੰਤਾ ਆਪਣੀ ਤਾਂ ਉਹਨਾਂ ਨੇ ਮਗਾ ਹੋਈ ਸੀ ਉਹ ਤਾਂ ਦੂਈ ਚੱਕੀ ਗਿਆ ਹੁਣ ਸਮਨ ਤੇ ਬਾਦ ਦੂਈ ਪੰਚੀ ਐ ਸੰਤੋਖ ਤੇ ਆ ਕੇ ਮੈਂ ਆਪਣੀ ਪਈਓਤ ਪੰਨਾ ਆਪਣੀ ਗੜਰੀ ਬੰਲੀ ਸੀ ਆਬੀ ਦਾ ਬਣਾ ਗੜਰੀ ਬੰਲੀ ਐ ਸੰਤੋਖ ਚ ਯਾ ਆਪਾ ਦੁਨੀਆ ਸੇ ਬਿਹਾਰੇ ਠੀਕ ਉਹ ਫੇਰ ਗੜਰੀ ਖੋਲਣੀ ਪਈ ਉਹ ਵੀ ਨਾਲ ਵੀ ਗੜੀ ਐ ਵੀ ਦੱਸਾ ਦੱਸਾ ਕੋਈ ਸਮਾਨ ਕੱਢ ਕੇ ਵਿੱਚੋਂ ਜੇ ਇਹਨਾਂ ਦੀ ਮੰਜ਼ਰ ਕਰੀਏ ਨਾਲ ਦੇ ਬੋਲਦੇ ਉੱਥੋਂ ਪਰਫਾਰੀ ਹੈ ਜਦੋਂ ਪਰਫਾਰੀ ਆਏ ਜਿਹੜੇ ਬੋਲਦੇ ਨੇ ਜਿਨ੍ਹਾਂ ਦਾ ਹੁਕਮ ਉਹ ਪਰਫਾਰੀ ਦੇ ਜਿਹੜੇ ਚੁੱਪ ਨੇ ਉਹ ਆਦੇ ਅੰਦਰ ਇੱਛਾ ਤਾਂ ਹੈ ਕੁਛ ਨਹੀਂ ਤੂੰ ਹੋ ਰਿਹਾ ਉਸ ਤੇ ਵੀ ਪਰ ਆਪ ਜਿਵੇਂ ਬਾਰੇ ਨਹੀਂ ਲੈਣਦਾ ਕੋਈ ਸੰਤਾ ਸੰਤਾ ਦਾ ਰਹਿ ਹੋਏ ਨੇ ਪਹਿਲਾਂ ਇਦਾਂ ਜਸਤਾ ਜੀਣਾ ਤੂੰ ਖੜਾ ਖੜਾਇਆ ਪਹਿਲਾ ਸੰਸਾਰਿਕ ਜਨਤਾ ਦਾ ਮਹਾਰਾਜੀ ਜਣਾ ਦੁਖੀ ਜਨਤਾ ਨਹੀਂ ਹੈ ਕਹਿੰਦੇ ਉੱਥੇ ਤਾਂ ਸੋਨਾ ਵੀ ਨਹੀਂ ਮਿਲਦਾ ਉਹਨੇ ਨੇ ਆਹ ਮਨ ਆਪਣੇ ਆਨੰਦ ਗੱਲ ਸੇ ਨੇ ਰੋਇਦਾ ਆਨੰਦ ਹੋ ਗਿਰ ਜਾਣਾ ਹੁੰਦਾ ਉਹਦਾ ਆਨੰਦ ਹੋ ਗਿਰ ਜਾਣਾ ਜੋ ਸੰਤਾਂ ਤੋਂ ਉਪਾਇੇ ਤੇ ਦੁਖੀ ਉਹਦੇ ਜਿਹਾ ਬੰਦ ਕੁਝ ਹੋ ਜਾਂਦਾ ਹਾਂਜੀ ਹਰ ਸਿਮਰਨ ਕੀ ਉਹ ਸਾਗਲ ਆਕਾਰਾ ਜੀ ਮੇ ਕੋਈ ਇੱਛਾ ਥੋੜੀ ਜਿਹੀ ਤਾਂ ਉਹ ਬੇਰੰਗੀ ਤੋਂ ਉੱਠਦੀ ਹੋਈ ਹੈ। ਧੋਣੀ ਹਰ ਸਿਮਰਨ ਕੀ ਉਹ ਸਾਗਲ ਆਕਾਰਾ ਹਰ ਸਿਮਰਨ ਮੈਂ ਆਪ ਨਰਕਾਰਾ ਤੇਰੀ ਕਿਰਪਾ ਜਿਸ ਆਪਕ ਜਾਇਆ ਨਾਨਕ ਗੁਰਮੁਖੀ ਹਰ ਸਿਮਰਨ ਤੇ ਨਹੀਂ ਪਾਇਆ। ਹੱਸ ਆਗਰ ਕੋ ਜੇ ਉਪਰ ਦੀ ਸਾਰੀ ਗੱਲ ਬੁੱਝਣ ਵਾਲੀ ਹੈ ਸਮਝਣ ਵਾਲੀ ਹੈ ਦੀ ਵੀ ਸਾਰੀ ਉਹ ਬਝਾ ਦਿੱਤਾ ਸੋ ਤਾਂ ਕਰੇ ਹੋ ਗਈ ਜਿਨੇ ਪਾ ਆਪਣਾ ਆਪਾ ਜਿਨੇ ਬੁੱਝ ਲਿਆ ਆਪ ਆਪਣਾ ਆਪਾ ਹੀ ਬੁੱਝਿਆ ਵੀ ਨੂੰ ਸਾਰਾ ਮਹਿਮਾਤ ਹੋਈ ਜਿਨੇ ਬੰਦੂ ਕੋਈ ਹਰ ਦੇ ਮਗਰ ਵਿਚ ਉਹ ਹਾਂ ਜਮਾ ਜੋ ਪ੍ਰਾਪਤੀ ਹੋਈ ਹੈ ਥੋੜੇ ਮੁਰਕੇ ਦੋਬਿਆ ਜੋ ਆਪ ਕਹਤਾ ਹੋ ਉਹ ਕੰਪਨੀਆਂ ਬੰਦ ਪੂਰੀ ਕੰਕਰੀਟ ਹੈ ਬਹੁਤ ਦੋ ਹੀ ਕੰਪਨੀਆਂ ਉਹ ਕੰਗੀਆਂ ਪਾਸੇ ਨਾਡ ਕੋਲ ਰਾਮ ਲੇਵ ਪ੍ਰਵਾਹ ਹਾਂ ਉੱਥੇ ਵੀ ਆਤਮ ਰਾਮ ਲੇਵ ਪ੍ਰਵਾਹ ਦੋਹੀ ਰਾਮ ਭੱਜ ਕਿੱਧਰ